ਗਗਨ ਗੰਭੀਰ ਗਗਨੰਤਰ ਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਗਗਨ ਤੋਂ ਵੀਰ ਹੈ ਚੁੱਪ ਹੈ ਸ਼ਾਂਤ ਗਗਨ ਚ ਕੋਈ ਆਵਾਜ਼ ਨਹੀਂ ਹੈ ਅੱਛਾ ਜੀ ਕੋਣ ਦਾ ਤਾਂ ਵਾਸ ਉਸ ਬਗਲ ਦੇ ਵਿੱਚ ਨਿਵਾਸ ਹੋ ਗਿਆ ਉੱਤੇ ਆਵਾਜ਼ ਕੋਈ ਨਹੀਂ ਜਾਂਦੀ ਜੋ ਜੀ ਇਹ ਫਿਰ ਇਹ ਮੇਜ ਕਰਦੀ ਗੱਲ ਹੋ ਰਹੀ ਹੈ ਜੀ ਅ ਸੰਸਾਰ ਦੇ ਵਾਜ ਨਹੀਂ ਹੈ ਗਗਨ ਦੇ ਵਿੱਚ ਸਾਚ ਕੰਦੇ ਵਾਜ ਤੇ ਠੀਕ ਹੈ ਜੀ ਬਤ ਕੋ ਦਾ ਸ਼ੋਰ ਤੀਏ ਸਾਰੀ ਕੋਈ ਵਾਜੇ ਗੁਣ ਗੰਧਨ ਉਤਰਵਾ ਠੀਕ ਹੈ ਜੀ ਗੁਣ ਗਾਵੈ ਸੁਖ ਸਹਿਜ ਨਿਵਾਸ ਕਸੂ ਕੁਸਾਇ ਜਿਹੜਾ ਅੱਲੇ ਸਾਰੇ ਗੁੰਡਾਂ ਦਾ ਇਨਕਾਰ ਕਰਦੇ ਕਰਦੇ ਦੇ ਹਿਰਦੇ ਚ ਬੋਲ ਕਦੀ ਕਰਦੇ ਆਪਣੇ ਹਿਰਦੇ ਚ ਕਰਦੇ ਨੇ ਇੱਕ ਦੋ ਅਰੂੜੀ ਸੁਣਦਾ ਹੈ ਜੇ ਸਮਾਗਤੀ ਕਰਦੇ ਕਰਦੇ ਗੁਰੂ ਦੇ ਉਤਰਵਾਚ ਕਰਦੇ ਨੇ ਜੇ ਉੱਤੇ ਠੀਕ ਹੈ ਤੇ ਆਪਣਾ ਸੁਖ ਸਾਗਰ ਦੀ ਗੱਲ ਹੈ ਜੀ ਵਾਜੀਉ ਗਿਆ ਲਾਈ ਗਿਆ ਨਾ ਆਵੇ ਉਦੋਂ ਚੱਲਿਆ ਗਿਆ ਆ ਕਦੇ ਹੂੰ ਹੂੰ ਆਵੇ ਲਾ ਜਾਏ ਆਵੇ ਉਹ ਜਾਣ ਪੈਦੀ ਉੱਤੇ ਖੁਦ ਵੀ ਉਹ ਜਾਣਨੀ ਗਿਆ ਸਾਡੇ ਦਰਬੀ ਹੋਇਆ ਹੂੰ ਗੁਰ ਪ੍ਰਸਾਦ ਰਹਿ ਲਿਬ ਲਾਈ ਜੋ ਗਿਆਨ ਲੈ ਗਿਆ ਸੀ ਦੀ ਆਪਣੇ ਗੁਰੂ ਜੁਰੇ ਆ ਰਹੇ ਨੇ ਠੀਕ ਹੈ ਗਗਨ ਅਗੰਮ ਅਨਾਥ ਅਜੋਨੀ ਅਸਥਰ ਚੀਤ ਸਮਾਦ ਸਗੋਨੀ ਗਗਨ ਦਾ ਕਗਨੂ ਦੀ ਕੁਝ ਵਿਆਖਿਆ ਜਾ ਸਕਦਾ ਕਗਨ ਬਾਰੇ ਹੂੰ ਹੂੰ ਤਬ ਕੋਈ ਨਹੀਂ ਹੈ ਵੀਰ ਉਹਦੇ ਬਾਰੇ ਕੀ ਦਸੀਏ ਹੂੰ ਹੂੰ ਜੀ ਚੀਜ਼ ਆਗਮਨ ਬਾਰੇ ਦੱਸਿਆ ਕੀ ਜਾਦਾ ਹੈ ਕਗਨ ਦੀ ਬਹੁਤੀ ਵਿਆਖਿਆ ਜੀ ਹੈ ਵਿੱਚ ਠੀਕ ਹੈ ਕਗਨ ਦੇ ਕੀ ਹੈ ਜੋ ਵਿੱਚ ਆ ਉਹਦੀ ਵਿਆਖਿਆ ਹੈ ਕਗਨ ਦੀ ਵਿਆਖਿਆ ਸਿੱਧੀ ਦੀ ਹੈ ਗਗਨਾਂ ਗਮਨਾਥ ਜੋਨੀ ਆਦਨ ਆਪੋ ਜਿਹੜੇ ਵਿਚ ਰਹਿੰਦੇ ਨੇ ਅਨਾਥ ਅਜੋਦੀ ਦੇ ਉਹ ਅਨਾਥ ਅਜੋਦੀ ਦੇ ਹਾਂਜੀ ਅਨਾਥ ਰੂਹੀ ਭਾਬਨ ਦਾ ਜੀ ਉਹਨਾਂ ਦੇ ਕਿਸੇ ਦੇ ਰੱਤ ਪਾਈ ਹੋਈ ਅੱਛਾ ਜੀ ਸੈਲਫ ਡਿਸਿਪਲਨ ਹਾਂ ਅਸਰ ਜੀਤ ਸਮਾਦ ਸਗੋਣੀ ਅਸਰ ਜੀਤ ਦੂਰ ਦੇਖ ਸਾਰੇ ਹੂੰ ਹੂੰ ਤੇ ਕੀ ਕਹਦੇ ਆਪ ਹਾਂਜੀ ਸਾਰੇ ਗੁਣ ਦੇ ਲੋੜ ਹੂੰ ਹੂੰ ਸਮਾਦਕੀ ਠੀਕ ਹੈ ਜੀ ਸਾਰੇ ਗੁਣ ਸਹਿਤ ਕਿਸੇ ਕੋਈ ਗੁਣ ਦੀ ਕਾਬੂ ਦੀ ਕਵੀ ਹਰ ਨਾਮ ਚੇਤ ਫਿਰ ਪਵੇਂ ਨਾ ਜੁਨੀ ਗੁਰਮਤਿ ਸਾਰ ਹੋਰ ਨਾਮ ਬਿਰੂਪੀ ਹੁੰਨੀ। ਨਾ ਗੰਧੋਬ ਕੇਤ। ਬਤੇ ਗਿਆ ਲੋਰਦੀ ਕੇਤਨ ਦੇ ਹੰ ਲੋਬ ਲਈ ਸਭ ਕੇਤਨ। ਫਿਰ ਬਬੇ ਨੇ ਜੁਦੀ। ਤੇ ਜੁਦੀ ਦੀ ਪੈਦਾ। ਗੁਰਮਤਿ ਸਾਰ ਹੋਰ ਲੋਬ ਬਿਰੂਪੀ। ਪੱਕੀ ਤੋਂ ਵੀ ਛੁੜੀ ਸਾਰ ਹੈ। ਗੁਰਬੁਧਰ ਮਤੇ ਗੁਰਤਾ ਕਿਸੇ ਬਤ ਗੁਰ। ਤੇ ਲੈ ਪਰ ਮਤੋਂ ਕਿਸਮਤ ਰੂਤਤਾ ਦੀ ਹੈ ਤਾਂ ਹੀ ਫਿਰ ਕਹਿੰਦੇ ਨੇ ਮੱਤੀ ਦੇਵੀ ਦੇ ਵਰ ਜੇਸਟ ਸਭ ਪਰਵਾਰੇ ਮਾਇਸਟ ਰੇਸ ਹੀ ਠੀਕ ਹੈ ਜੀ ਜੋ ਤੇ